ज्ञान गवाया दूजा पाया गर्व गले बिक खाया गुर रस गीत बाध नहीं भाव है सुनिए गहर गंभीर गवाया ज्ञान गवाया दूजे पाया ज्ञान मानता था सचखंड के देखो घड़ी की सत्ता अच्छा ਉਹ ਮਾਇਆ ਦੀ ਵਡਿਆਈ ਦੀ ਭੁੱਖ ਪੈਦਾ ਹੋ ਗਈ ਉਹ ਗਿਆਨ ਗਵਾਇਆ ਗਿਆ ਦੂਜੇ ਪਾਇਆ ਗੱਲ ਬਗਲ ਦੇ ਵੀ ਖਾਇਆ ਕੋਈ ਕਾਰਨ ਹੋ ਗਿਆ ਦੂਜਾ ਜਿਹੜਾ ਸੰਸਾਰੀ ਵਡਿਆਈ ਦੀ ਭੁੱਖ ਹਉ ਕਾਰ ਦਾ ਪ੍ਰਤੀਕ ਹੈ ਬੋਲ ਤੈਸਾ ਗਰਭ ਗਲੇ ਬਿ ਖਾਇਆ ਹਮ ਗੁਰ ਰਸ ਗੀਤ ਬਾਦ ਨਹੀਂ ਭਾਵੈ ਗੁਰ ਰਸ ਗੀਤ ਬਾਦ ਨਹੀਂ ਭਾਵਣ ਹਮ ਸੁਣੀਏ ਰਸ ਨੇ ਜਿਹੜੇ ਗੁਰ ਗਿਆਨ ਦੇ ਰਾਸ ਵਾਲੇ ਗੀਤ ਨੇ ਉਹਦਾ ਬਾਦ-ਬਾਦ ਕਰਦੇ ਤੇ ਬਾਦ-ਬਾਦ ਨਹੀਂ ਨਹੀਂ ਭਾਵ ਹੈ ਜਿੰਮੇ ਜੇ ਜੇਰੇ ਬਿਨਾ ਕਦੇ ਸਾਥੀ ਸੁਖਾਰ ਮੈਨੂੰ ਕਿਹਾ ਤੂੰ ਇਹ ਤਾਂ ਹੋਏ ਨਹੀਂ ਸਕਦਾ ਜਦੋਂ ਪੌਂਦੇ ਦੀ ਤਾਂ ਤੇ ਫਿਰ ਵਿਰੋਧ ਕਰਦਾ ਉਹ ਉਤਲੀ ਗਈ ਕਿ ਜੇੜੀ ਲੱਗਦੇ ਜਿਹੜਾ ਆਪਾਂ ਗਰਭ ਦਾ ਕੀ ਭਾਵ ਸੀਗਾ ਜੀ ਦੂਜਾ ਪਾਇਆ ਗਰਭ ਗਲੇ ਵਿੱਚ ਖਾਇਆ ਤਾਂ ਕੀ ਭਾਵ ਸੀ ਗਰਭ ਕਰਕੇ ਗਲ ਗਿਆ ਕਾਲ ਕਰਕੇ ਹਮ ਕਾਨਸਟ੍ਰਸ ਦੇ ਗਣਕੇ ਗੋੜੂ ਅੱਛਾ ਕਾਲ ਹੋ ਗਿਆ ਨਾ ਹਾਂਜੀ ਇਹ ਗਰਬਲ ਆ ਵੈ ਗੱਗਾ ਰਬਾ ਹਾਂ ਇਹ ਬੱਬੇ ਵਾਲਾ ਹਾਂਜੀ ਬੱਬੇ ਨਾਲ ਨਹੀਂ ਹੈ ਨਹੀਂ ਬੱਬੇ ਵਾਲਾ ਜੀ ਮਤਲਬ ਗੌਰਵ ਕਰਨਾ ਆਪਣੇ ਆਪ ਤੇ ਹੰਕਾਰ ਕਰਨਾ ਹੁੰਦਾ ਹੂ ਹਾਂਜੀ ਗੁਰ ਰਸ ਗੀਤ ਬਾਦ ਨਹੀਂ ਭਾਵੇ ਸੁਣੀਏ ਗਹਿਰ ਗੰਭੀਰ ਗਵਾਇਆ ਗੁਰ ਰਸ ਦੀ ਤਾਂ ਨਾਨਕ ਕੁਰਬਾਨੀ ਦੇ ਵਿਚਾਰਤਾਰ ਹੈ ਇਹ ਗੁਰਦੇ ਗਿਆਨ ਦੇ ਰਸ ਵਾਲੇ ਗੀਤ ਜਿੱਡੇ ਲੱਗਦੇ ਅੱਛਾ ਜੀ ਬਾਦ ਨਹੀਂ ਪਾਵਾ ਹਾਂ ਨਹੀਂ ਪਾਵਾ ਸੁਣੀਏ ਗਹਿਰ ਗੰਭੀਰ ਗਵਾਇਆ ਆਇਆ ਗਹਿਰ ਗੰਭੀਰ ਅਸੀ ਸੁਣ ਕੇ ਗਵਾਦੀਰੇ ਲੈ ਅੱਛਾ ਜੀ ਆਹੋ ਅੱਛਾ ਜੀ ਹਰ ਤਾਨੇ ਨਾਲ ਬਣਾ ਲੈ ਜੀ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨ ਸਾਚ ਸੁਖਾਇਆ ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪੀ ਆਇਆ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਸੱਚ ਕੇ ਹੈ ਏਡਾ ਅੰਮ੍ਰਿਤ ਮਿਲਿਆ ਸੁਖ ਸਕਤੇ ਜਿਹੜਾ ਤੇਣਾ ਉਹੀ ਤਾਂ ਅੰਮ੍ਰਿਤ ਮਿਲਿਆ ਅੰਮ੍ਰਿਤ ਰਹਾ ਮਨ ਤਨ ਸਾਚ ਸੁਖਾਇਆ ਇਹ ਗੁਰੂ ਨੇ ਸੱਚ ਕਹਿਆ ਉਹਦਾ ਅੰਮ੍ਰਿਤ ਨੇ ਲੈ ਲਿਆ ਕੋਈ ਰੂਹ ਤਾਂ ਨੂੰ ਸੱਚ ਸੁਖਦਾਇਕ ਲੱਗ ਗਿਆ ਤੇਰੇ ਗੁਰੂ ਉੱਤ ਗਿਆ ਪਹਿਲਾ ਮਨੁੱਖ ਬਣ ਗਿਆ ਸੀ ਅਜੇ ਗੁਰ ਗੋਲਬੂ ਦੀ ਬਾਤ ਸਿਰੂ ਹੋ ਗਿਆ ਔਰ ਉਹ ਉਹ ਬਣ ਜੂਗਾ ਉਹ ਹੀ ਆਦਮੀ ਹੈ ਕਿ ਇਹ ਗੁਰ ਗੋਲਬੂ ਬਣਨਾ ਤੇ ਨਹੀਂ ਇਹ ਗੱਲ ਤੇ ਆਪੇ ਗੁਰਮੁਖ ਆਪੇ ਦੇਵੇ ਆਪੇ ਆਪੇ ਗੁਰਮੁਖ ਕਿਹਾ ਜੀ ਦੇਵ ਹਾਂ ਜੀ ਆਪੇ ਗੁਰੂ ਦਾ ਹਾਂ ਆਪੇ ਦੇਵ ਆਪੇ ਦਾ ਨਾਂ ਆਪੇ ਲੈਣਾ ਹਾਂ ਆਪੇ ਅੰਮ੍ਰਿਤ ਪੀ ਪੀ ਆਇਆ ਲਿਖਿਆ ਹੈ ਜੀ ਆਹ ਆਪੇ ਅੰਮ੍ਰਿਤ ਪੀਦਾ ਹਾਂ ਠੀਕ